ਸ਼ੇ ਲੋਕ ਮਹੱਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਈ ਪੈ ਕਰੀ ਤੇਰਪਾ ਕਰਪਾਲ ਆਪੇ ਬਖਸ਼ ਲੈ ਇਹ ਕਿਰਪਾ ਕਰਕੇ ਆਪੇ ਤੂੰ ਬਖਸ਼ ਲੈ ਮੈਨੂੰ ਸਦਾ ਸਦਾ ਜਪੀ ਤੇਰਾ ਨਾਮ ਅਕਸ਼ਿਟ ਕੀ ਕਰੇਗਾ ਮੈਂ ਤੇਰਾ ਸਦਾ ਨਾਮ ਜਪਦਾ ਰਹੂ सतगुरु पाए पाए सतगुरु दी चाडी लाग के सतगुरु दे पीछे लाग दा कहवा मड के नाम जब सभिदा रह जानदार हां जब तक कुर्बानी नु सभिदा रह हां जी मन तन अंतर बस दुखा ना दे, आप रख व्यापै पाओ ना कोई मन अपने अंदर बसे उतरे चाके अंतर मुखी हो मन रहे ਦੁੱਖਾਂ ਨਾ ਸ਼ੋਏ ਤਾਂ ਕਿ ਦੁੱਖਾਂ ਦਾ ਨਾ ਹੋ ਜੇ। ਜੇ ਤਰਕੁਟੀ ਜਾ ਕੇ ਬਾਹਰ ਮਨ ਬਾਤ ਹੁੰਦਾ ਅਗਰ ਉਹਦੇ ਨਾਲ ਖੇਲਦਾ ਤਾਂ ਦੁਖੀ ਹੁੰਦਾ। ਅਗਰ ਸਾਕਰ ਦੁਖੀ ਹੁੰਦਾ ਮਨ। ਹੱਥ ਦੇ ਆਪ ਰੱਖ ਵਿਆਪੇ ਪਾਉ ਨਾ ਕੋਈ। ਕੀ ਕਰਕੇ ਆਪਣਾ ਹੱਥ ਦੇ ਕੇ ਬੰਨੂ। ਰੱਖ ਡੋਲੇ ਨਾਲ ਡੋਲਣ ਤੋਂ ਆਪਣਾ ਹੱਥ ਹੁਕਮ ਰੂਪੀ ਹੱਥ ਦੇ ਕੇ ਰੱਖ। ਤੇਰੀ ਇੱਛਾ ਹੋਵੇ ਕਿ ਮਨ ਮੇਰਾ ਨਾ ਡੋਲੇ। ਸਾਹੀ ਸਭਬ ਹੈ ਕਿ ਆਪੇ ਭਾਉ ਨਾ ਕੋਏ ਮੇਰੇ ਕੋਈ ਵੀ ਡਰ ਨਾ ਬਿਆਪੇ ਵੀ ਆਏ ਹੋ ਜਬੇ ਹੋ ਜਬੇ ਉਹ ਨਾ ਹੋ ਜਬੇ ਕੋਈ ਚਿੰਤਾ ਫਿਕਰ ਤੋਂ ਮੁਕਤ ਕਰ ਦੇ ਬਿਦੂ ਹੇ ਗੁਰ ਗਾਵਾਂ ਦਿਨ ਰਾਤ ਇੱਥੇ ਕੰਮ ਲਾਏ ਸੰਤ ਜਿ ਆਕੇ ਸੰਗੀ ਹਮੇ ਰੋਗ ਜਾਏ ਗੁਰ ਗਾਵਾਂ ਦਿਨ ਰਾਤ ਮੈਂ ਦਿਨ ਰਾਤ ਤੇਰੇ ਗੁਣ ਗਾਇਨ ਕਰਦਾ ਰਹਾਂ ਇੱਥੇ ਕੰਮ ਲਾਏ ਇਸ ਕੰਮ ਲਾ ਦੇ ਬਿਦੂ ਤੇਰੇ ਗੁਣ ਗਾਇਨ ਕਰਦਾ ਰਹਾਂ ਦਿਨ ਰਾਤ ਗੁਣ ਗਾਇਨ ਗੁਰਬਾਣੀ ਸੰਤ ਜਨਾਂ ਦੇ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਹਉਮੈ ਰੋਗ ਜਾਏ ਹਉਮੈ ਰੋਗ ਚਲੇ ਜਾਵੇ ਹਉਮੈ ਰੋਗ ਸੰਤ ਜਨਾਂ ਦੀ ਸੰਗਤ ਕਰ ਵਿੱਚ ਰਹਿ ਕੇ ਹੀ ਹਰ ਵਕਤ ਆਹੀ ਸੰਤ ਜਨਾਂ ਦਾ ਭਾਵ ਦੱਸੋਗੇ ਜੀ ਕਿਉਂਕਿ ਸੰਤ ਦਾ ਇੱਕ ਨਹੀਂ ਮਿਲਦਾ ਸੰਤ ਜਨਾਂ ਦੀ ਗੱਲ ਜੀ ਹੋ ਰਹੀ ਜਿਹਨਾਂ ਨੂੰ ਗਿਆਨ ਹੋਵੇ ਸੰਤ ਕੀ ਹੁੰਦਾ ਜਾਣਨਾ ਮਤਲਬ ਜਾਣਕਾਰ ਆਤਮ ਗਿਆਨੀ ਹਦ ਕੱਲਾ ਸੰਤ ਨਹੀਂ ਹੈ ਸਭ ਹੋਰ ਹਰ ਕਾ ਸੰਤ ਹੋਰ ਹੈ ਸਭ ਤਾਂ ਨੂੰ ਠੱਗ ਕੇ ਆਏ ਉਹ ਹਰ ਕੈ ਸੰਤ ਨਾ ਕੀ ਬਨਾਰਸ ਕੇ ਠੱਗ ਜਿਹੜੇ ਆਪਣੇ ਨਾਲ ਕੱਲਾ ਸੰਤ ਲਾਉਂਦੇ ਨੇ ਠੱਗ ਨੇ ਕਬੀਰ ਨਹੀਂ ਕਹਤਾ ਸੀ ਸੋ ਕੇ ਸੰਤੇ ਸੰਤ ਨੇ ਜਿਨ੍ਹਾਂ ਦੇ ਕੋਲ ਸੱਚ ਦਾ ਗਿਆਨ ਨਹੀਂ ਹੁੰਦਾ ਉਹ ਠੱਗ ਹੁੰਦੇ ਨੇ ਗੋਲਾਨ ਕਹਿੰਦਾ ਇਨਾਨ ਕੇ ਸੰਤ ਮਲੇ ਸੱਚ ਪਾਈ ਹੈ ਅੱਜ ਸੰਤਾ ਕੋ ਸੱਚ ਹੈ ਨਹੀਂ ਕਿਸੇ ਕੋਲ ਵੀ ਕਿ ਹੈ ਜੀ ਉਹ ਸੰਤਨੀ ਜਿਹੜੇ ਗੁਰਨਾਨਕ ਦੀ ਕਸੌਟੀ ਤੇ ਪੂਰੇ ਨੇ ਗੁਰਬਾਣੀ ਦੀ ਕਸੌਟੀ ਵਾਲੇ ਸੰਤਾਂ 'ਚ ਇੱਕ ਵਧੀ ਹੈ ਇਹ ਹੈ ਤਾਂ ਸਾਚ ਦਾ ਅਦੇਸ਼ ਕੀ ਹੈ ਨਾ ਇਹਨਾਂ ਨੂੰ ਸੰਤ ਇਹਨਾਂ ਦੇ ਗੁਰੂਆਂ ਸਰਬਨਿਰੰਤਰ ਖਜ਼ਮ ਖਜ਼ਮ ਦਾ ਸਰਬ ਸਾਰਿਆਂ ਦੇ ਵਿੱਚ ਇੱਕੋ ਹੀ ਹੈ ਹਰ ਤਾਂ ਸਾਰੇ ਇਕੱਠ ਗੱਲ ਮੈਂ ਆ ਜੂਗਾ ਕੋਈ ਹੁਕਮ ਗੁਰਪ੍ਰਸਾਦੀ ਸੱਚ ਸੱਚੋ ਸੱਚ ਨਾ ਇਹ ਤਾਂ ਗੁਰਪ੍ਰਸਾਦ ਹੈ ਸੱਚਿਆ ਦੇ ਹੀ ਸੱਚ ਲੈਂਦੇ ਨੇ ਜਿਹਨੂੰ ਪਹੁੰਚਦਾ ਉਹੀ ਸੱਚ ਲੈਂਦੇ ਨੇ ਉਹੀ ਸੱਚ ਫਰੀਦ ਕੂੜਾ ਤਾਂ ਸੱਚ ਸੁਣ ਕੇ ਹੀ ਜਲ ਜਾਂਦਾ ਹੈ ਕੂੜਿਆ ਤਾਂ ਕਿਆ ਰਈ ਸੱਚ ਲੈੰਦੇ ਦੇ ਸਚੋ ਸੱਚ ਲਹਿਆ ਸੱਚੇ ਸਤ ਤੇਰੀ ਨੇ ਸੋਈ ਦਇਆ ਕਰੋ ਦਇਾਲ ਆਪਣੀ ਸਿਫਤ ਦਿਓ ਦਰਸ਼ਨ ਦੇਖ ਨਿਹਾਲ ਨਾਮਿਕ ਪ੍ਰੀਤ ਇਹ ਕਿਆ ਕਰੋ ਦਇਾਲ اے ਦਇਾਲ ਮੇਰੇ ਤੇ ਦਇਆ ਕਰੋ ਆਪਣੀ ਸਿਫਤ ਦਿਓ ਆਪਣੀ ਤੇਰੀ ਸਿਫਤ ਕਰਾਂ ਹਰ ਵਕਤ ਇਹੀ ਮੈਂ ਇਹੀ ਮੰਗਦਾ ਮੇਰੀ ਤੇਰੀ ਸਿਫਤ ਕਰਾਂ ਆਪਣੀ ਸਿਫਤ ਦਿਓ ਦਰਸ਼ਨ ਦੇਖ ਦਿਹਾਲ ਮੈਂ ਤੇਰਾ ਦਰਸ਼ਨ ਦੇਖਾ ਤਾਂ ਦਿਹਾਲ ਹੋ ਜਾਵਾਂ ਦਰਸ਼ਨ ਦੇਖ ਕੇ ਨਿਹਾਲ ਜਦ ਦੇਖਾਂ ਤਾਂ ਗਾਵਾਂ ਗਾਉਂ ਹੋ ਦਰਸ਼ਨ ਦੇਖ ਕੇ ਨਿਹਾਲ ਹਰ ਹਦਾਨ ਕਪੀਤ ਹੋ ਪ੍ਰੀਤ ਆ ਮਰੇ ਅੰਦਰ ਕਿਥੇ ਗੱਲ ਨਾਲ ਪ੍ਰੀਤ ਹੈ ਹੋਰ ਪ੍ਰੀਤੇ ਕੋਈ ਨਹੀਂ ਕਿਸੇ ਗੱਲ ਨਾਲ ਹੋਜੀ ਦਰਸ਼ਨ ਦੇਖ ਨਿਹਾਲ ਆਪਣੇ ਮੂਲ ਦੇ ਦਰਸ਼ਨ ਦੀ ਗੱਲ ਹੈ ਜੀ ਜੇ ਗੁਣ ਗਾਉਣੇ ਨੇ ਜੀਦੇ ਉਹਨੂੰ ਦੇਖਿਆ ਹੀ ਨਹੀਂ ਗਾ ਕੇ ਦਊ ਜਦ ਦੇਖਾਂ ਤਾਂ ਗਾਵਾਂ ਜੋ ਨੀ ਸੰਤਰੀ ਸੋ ਬੋਲੇ ਜੋ ਪੇਖੇ ਅੱਖੀ ਅੱਖੀ ਦੇਖੀ ਹੋ ਯਾਰ ਗੱਲ ਐ ਇਹ ਵੀ ਜਿਹੜੀ ਅੱਖੀ ਦੇਖੀ ਜੋ ਦੇਖੀ ਹੋਈ ਨਹੀਂ ਜੋ ਬੁੱਧੀ ਨਾਲ ਹੋਇਆ ਉਹ ਪੇਖਿਆ ਹੋਇਆ ਜੋ ਸਮਝ ਕੇ ਬੋਲਦੇ ਉਹੀ ਦਰਸ਼ਨ ਆ ਜੋ ਪਤਾ ਐ 100% ਪਰੰਪਰਿ ਸੱਚ ਐ ਤਾਲ ਬੋਲਦੇ ਨੇ ਮਹੱਲਾ ਪੰਜਵਾਂ ਇਕੋ ਜਪੀਐ ਮਨੈ ਮਾਹੀਂ ਇਕਸ ਕੀ ਸ਼ਰਨਾਈ ਇਕਸ ਸਿਉ ਕਰ ਪਿਰੜੀ ਦੂਜੀ ਨਾਹੀਂ ਜਾਈ ਇਕ ਕੀਆ ਇਕ ਸੱਚੇ ਜਨ ਸਾਚੀ ਜਨ ਜਾਣਦੇ ਹੀ ਸੱਚ ਸੁਆ ਜਾਈਦਾ ਸਚਿਆਰੇ ਹੋ ਜਾਈਦਾ ਇਕਸ ਕੀ ਸ਼ਰਨਾਈ ਇੱਕ ਵੀ ਛੱਡ ਲੋ ਸੱਚ ਦੀ ਇਨਾਂ ਰੋ ਦੀ ਚੱਲ ਜਾਣ ਦੀ ਲੋੜ ਨਹੀਂ ਇਕਸ ਸਿਉ ਕਰ ਪਿਰੜੀ ਇੱਕ ਦੇ ਸੱਚਾ ਉਹਦੇ ਅੱਗੇ ਹੀ ਅਰਦਾਸ ਕਰ ਜੋਦੜੀ ਕਰ ਫਿਰੜੀ ਕਰ ਦੂਜੀ ਦੋਹੀ ਜਾਈ ਦੂਜੀ ਜਵਾਲੀ ਜਾਈਦਾ ਚੋੜ ਵਾਲੀ ਜਾਈਦਾ ਚੋੜ ਦਾ ਨਹੀਂ ਡਰ ਹੈ ਮਾਇਆ ਮਾਇਆ ਦੀ ਇੱਛਾ ਦੀ ਰੱਖੀ ਦੀ ਸੱਚ ਦੀ ਇੱਛਾ ਇੱਕ ਦੂਜੀ ਨਾ ਹੀ ਜਾਏ ਦੂਜੀ ਜਦਾਂ ਜਾਣੀ ਵੀ ਚਾਹੀਦਾ ਦੂਜੀ ਤਰਫ ਧਿਆਨ ਵੀ ਚਾਹੀਦਾ ਦੂਜੀ ਮਾਇਆ ਹੀ ਹੈ ਮਾਇਆ ਰੂ ਦੀ ਕੀ ਦੂਜਾ ਸ਼ੇਰ ਮਾਇਆ ਦਾ ਨਾ ਇੱਧਰ ਤਾਂ ਜਾ ਇੱਧਰ ਲਾ ਪਾਸੇ ਤਾਂ ਜਾਣਾ ਹੀ ਨਹੀਂ ਚਾਹੀਦਾ ਨਾ ਚੱਕਣ ਦੀ ਲੋੜ ਇਹਦੀ ਇਹਦਾ ਉਹਦੀ ਜ਼ਿੰਮੇਵਾਰੀ ਆਪ ਆ ਜਿਹਦਾ ਹੈ ਜਿਹਦੀ ਕੋ ਦਾਤਾ ਮੰਗੀਏ ਸਭ ਕੁਝ ਪੱਲੇ ਪਾਏ ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਤੇ ਆਏ ਇੱਕੋ ਦਾਤਾ ਮੰਗੀਏ ਇੱਕ ਦਾਤਾ ਬੰਗਲੋ ਬਾਕੀ ਛੱਡੋ ਬੈਠੋ ਦੋਦਿਆਂ ਨੂੰ ਬਣਾ ਕੀ ਹੈ ਇੱਕੋ ਦਾਤਾ ਗੁੱਝੀ ਹੈ ਸਭ ਪੱਲੇ ਜੇ ਤੋ ਸਭ ਪੱਲੇ ਪੈ ਜਵੇ ਉਹ ਇੱਕ ਦਾਤਾ ਉਹ ਚਾਹੀਦਾ ਉਹ ਗੋਣਾ ਉਹ ਤਾਂ ਹੁਕਮ ਇਹ ਉੱਤਾਰ ਸਕਦਾ ਕੁ ਹੁਕਮਾਂ ਜਾਈ ਚੱਲਣਾ ਉਹਦੀ ਰਾਜ ਵਿੱਚ ਚੱਲੋ ਉਹ ਤੋਂ ਸਭ ਕੁਝ ਪੱਲੇ ਪੈ ਜੂ ਬਨ ਤਾਂ ਸਾਸ ਗਰਾਸ ਪ੍ਰਭ ਕਿ ਕੋਈ ਟਿਕਿਆ ਹੈ ਬਨ ਰੱਖੋ ਬੜੇ ਗੂੜ ਤੇ ਧਿਆਨ ਰੱਖੋ ਸਾਧਨ ਦਾ ਗੂੜ ਇੱਕੋ ਹੀ ਹੈ ਅਰਜੀ ਮੰਨ ਤਨ ਸਾਹ ਗਿਰਾਸ ਪ੍ਰਭ ਇੱਕੋ ਇੱਕ ਤੇ ਆਏ ਸਿਰਫ ਪ੍ਰਭ ਦੇ ਆਈ ਧਿਆਨ ਕਰਨਾ ਹੈ ਜੀ ਆ ਆਪਣੇ ਦਾ ਜਿਹੜੀਆਂ ਪ੍ਰਭ ਦੇ ਅਰਥ ਪ੍ਰਭੂ ਕਰਦੀਆਂ ਪ੍ਰਭ ਨੂੰ ਵਾਹਿਗੁਰੂ ਕਹਿੰਨੀ ਐ ਫਿਰ ਉਹਨਾਂ ਦੇ ਤਾਂ ਫਿਰ ਅਰਥ ਬਹੁਤ ਗਲਤ ਹੈ ਜੀ ਉਹ ਤਾਂ ਗਲਤ ਹੈ ਪਤਾ ਹੀ ਆਪਾਂ ਨੂੰ ਗਲਤ ਸਾਰੀ ਤਾਂ ਠੀਕ ਹੋ ਰਹੀ ਨੇ ਪੰਡਤ ਨੇ ਕੀਤੇ ਗਲਤ ਪੰਡਤ ਆਲਾ ਪ੍ਰਭੂ ਹੈ ਜਿਹੜਾ ਉਹ ਲਿਆ ਕੇ ਇੱਧਰ ਬਾੜਤਾ ਆਪਣੇ ਵਾਲੇ ਪਾਸੇ ਉਹ ਪੰਡਤ ਦਾ ਨਾ ਪ੍ਰਭੂ ਹਾਂਜੀ ਪੰਡਤ ਨੇ ਹਰ ਕੀਤੇ ਨੇ ਹਾਲ ਫੇਰ ਨੇ ਤਾਂ ਸਿੱਖਾਂ ਨੇ ਤਾਂ ਅਰਥੇ ਗੁਰਬਾਣੀ ਦੇ ਉਹ ਤਾਂ ਪਤਾ ਹਾਂ ਵਿਚਾਰਨ ਲੱਗੇ ਹੋਏ ਇਹਨਾਂ ਨੇ ਵਿਚਾਰ ਉਹਦੇ ਉਹ ਜਾਣਦੇ ਨੇ ਵੀ ਗਲਤੀ ਹੋਈ ਹੋਈ ਹੈ ਉਹਨਾਂ ਨੂੰ ਵੀ ਸਮਝ ਆਇਆ ਸਾਰੇ ਮੰਨਦੇ ਨੇ ਸਾਰਿਆਂ ਨੇ ਵਟੀਆਂ ਵੀ ਗਲਤੀ ਹੋਈ ਹੋਈ ਹੈ ਹੋਜੀ ਅੰਮ੍ਰਿਤ ਨਾਮ ਨੇਦਾਨ ਸੱਚ ਗੁਰਮੁਖੀ ਪਾਇਆ ਜਾਏ ਵੜ ਭਾਗੀ ਤੇ ਸੰਤ ਜਨ ਜਿਨ ਮਨ ਮੁਠਾ ਆਏ ਅੰਮ੍ਰਿਤ ਨਾਮ ਨਾਮ ਇਹ ਨਿਧਾਨ ਆ ਇਹ ਹੀ ਅੰਮ੍ਰਿਤ ਹੈ ਗੁਰਮੁਖੀ ਪਾਇਆ ਜਾਏ ਗੁਰਮਖਾ ਨੇ ਪ੍ਰਾਪਤ ਕੀਤਾ ਹੋਰ ਕਿਸੇ ਨੇ ਪ੍ਰਾਪਤੇ ਨਹੀਂ ਕੀਤਾ ਫੱਡੀ ਭੋਤੀ ਸੰਤਾਂ ਨੂੰ ਦਾ ਪ੍ਰਾਪਤ ਹੁੰਦਾ ਉਹ ਕਹਿੰਦੇ ਗੁਰਮਖਾ ਨੂੰ ਕਹਿੰਦਾ ਵੀ ਸੰਤ ਨੂੰ ਨਾ ਮਿਲਿਆ ਨਾ ਗੁਰਮੁਖੀ ਪਾਇਆ ਜਾਏ ਛੋਟੇ ਹੋ ਕੇ ਮਿਲਦਾ ਹੈ ਆਪਣੇ ਦਾਸ ਗੁਰਦੇ ਵੜਾਈ ਆਪਣੇ ਦਾਸ ਕੋ ਨਾਮ ਜਪਾਈ ਦਾਸ ਨੂੰ ਮਿਲਦਾ ਹੈ ਦਾਸ ਹੈ ਬੜ ਤੇ ਸੰਤ ਜਨ ਅਸੰਤ ਦੇ ਨਾਲ ਜਨ ਲਾਗੇ ਅਲਫਾ ਨੇ ਉਹ ਨੂੰ ਗਿਆਨ ਜਾਣਕਾਰ ਗਿਆਨੀ ਨੇ ਜਿਨ੍ਹਾਂ ਦਾ ਮਨ ਖਸਮ ਦੀ ਰਜ਼ਾ ਚ ਹੈ ਚੱਲਦੇ ਨੇ ਜਿਹੜੇ ਗੁਰਤੇ ਬਾਣਦੇ ਜਿਨ੍ਹਾਂ ਮਨ ਉੱਠਾ ਆਏ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋ ਗਿਆ ਜਿਹਨਾਂ ਦੇ ਅੰਦਰ ਬਾਰਿਸ਼ ਕਰਦੀ ਓਦਿ ਜਿਹਨਾਂ ਨੂੰ ਅੰਦਰੋਂ ਜਾਗਰਤ ਕਰਤਾ ਜਾਨਾ ਮਤਲਬ ਹੈ ਸੰਤ ਜਾਨੇ ਜਿਨ੍ਹਾਂ ਨੇ ਮਰਜੂ ਬੁਠਾਇਆ ਲੋ ਜੀ ਜਨ ਥਲ ਮਹੀਲ ਰਵ ਰਹਾ ਦੂਜਾ ਕੋਈ ਨਾਹੀਂ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਈ ਜਲ ਵਿੱਚ ਵੀ ਥਲ ਵਿੱਚ ਵੀ ਧਰਤੀ ਵਿੱਚ ਵੀ ਸਾਰੇ ਹੀ ਰਵ ਰਿਆ ਕੋ ਕੋਪਾ ਸਾਰੇ ਹੀ ਆ ਰੰਗ ਦੂਜਾ ਕੋਈ ਨਹੀਂ ਦੂਜੇ ਦੇ ਕਿਸੇ ਦਾ ਹੁਕਮ ਨਹੀਂ ਚਲਦਾ ਕੋਈ ਹੁਕਮ ਚਲਦਾ ਦੂਜਾ ਕੋਈ ਨਹੀਂ ਇੱਕ ਦਾ ਹੀ ਸਾਰੀ ਕਰਾਮਾਤ ਹੈ ਨਾਮ ਕਿ ਆਈ ਨਾਮ ਕਰਕੇ ਉਸ ਨਾਮ ਦੇ ਪਿੱਛੇ ਮੇਰਾ ਧਿਆਨ ਰਹੇ ਉਚਾਰਨ ਕਰਾਂ ਉਚਰਾਂ ਨਾਨਕ ਖਸਮ ਰਜਾਏ ਨਾਨਕ ਕਹਿੰਦੇ ਖਸਮ ਦੀ ਰਜ਼ਾ ਲੈ ਕੇ ਮੈਂ ਤਾਂ ਨਾਮ ਦੇ ਵਿੱਚ ਧਿਆਨ ਰੱਖਾਂ ਹੁਕਮ ਦੇ ਵਿੱਚ ਧਿਆਨ ਰੱਖਾਂ ਹੁਕਮੰਦਾ ਜਿਹੜੇ ਜੋ ਹੁਕਮ ਕਰ ਰਿਹਾ ਹੁਕਮ ਤੇ ਕਰਾਂ ਮਾਤੀ ਤੁਹਾਨੂੰ ਦੱਸਦਾ ਰਾਂ ਦਾ ਗੁਣ ਕਾਇ ਕਰਦਾ ਰਾਂ ਨਾਨਕ ਖਸਮ ਰਜਾਈ ਖਰਮ ਹਗਮ ਰਜਾ ਜੀ ਫੜੀ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੋਣ ਜਿਸ ਤੂੰ ਰਖਵਾਲਾ ਜਿੱਤਾ ਤਿਨੇ ਭੈਣ ਜਿਹੜਾ ਤੂੰ ਰਖਵਾਲਾ ਹੋਵੇਂ ਜਿਸ ਨੂੰ ਤੂੰ ਰਖਵਾਲਾ ਮਾਰੇ ਤੇਸ ਕੋਣ ਉਹਨੂੰ ਕੋਣ ਮਾਰ ਸਕਦਾ ਜਿਸ ਨੂੰ ਤੂਰਖਵਾਲਾ ਜਿੱਤਾ ਤੇਨਾ ਭੈ ਜਿਹਦਾ ਤੂਰਖਵਾਲਾ ਹੋਵੇ ਨਾ ਉਹ ਹੈ ਨਾ ਔਗਣਾ ਦਾ ਜੰਦ ਪਵ ਸਾਗਰ ਤਰਿਆ ਜਿਹਦਾ ਤੂਰਖਵਾਲਾ ਹੋ ਪਵ ਸਾਗਰ ਤੇ ਉਹਨੂੰ ਕੋਈ ਨਹੀਂ ਮਾਰ ਸਕਦਾ ਕਾਲਪੁਰਖ ਦਾ ਮਾਰਦਾ ਮੋਰ ਕਹਿੰਦਾ ਕਬੀਰ ਕਾਲਪੁਰਖ ਨੇ ਜਿਹੜਾ ਉਹਦੇ ਕਾਲ ਤੋਂ ਪਰੇ ਚਲਾ ਗਿਆ ਕਾਲ ਦੇ ਕਾਲ ਤੋਂ ਪਰੇ ਚਲਾ ਗਿਆ ਤਰ ਗਿਆ ਭੈਣ ਦਾ ਉਹਨਾਂ ਪੈਸਾ ਅੰਦਰ ਨਿਰਪੈ ਹੋ ਗਿਆ ਉਹ ਹਾਂਜੀ ਨਿਰਪੈ ਨੇ ਲਿਖਿਆ ਹੋਇਆ ਵੀ ਤਿੰਨ ਲੋਕ ਜਿੱਤ ਲਏ ਉਹਨੇ ਭੈਣ ਤਿੰਨ ਲੋਕ ਹੋ ਸਕਦੇ ਤਿੰਨ ਲੋਕ ਦੇ ਵਿੱਚ ਤਾਂ ਮਾਇਆ ਮਾਇਆ ਤਾਂ ਪਰੇ ਚਲੇ ਗਿਆ ਜਿੱਤਗਾ ਆਪ ਹੀ ਛੱਡ ਗਿਆ ਤਿੰਨ ਲੋਕ ਨੂੰ ਚੌਥੇ ਲੋਕ ਚਲੇ ਗਿਆ ਇਹ ਲੋਕ ਪਾਰ ਕਰ ਲੈ ਕਹਿ ਲੋ ਅੱਛਾ ਜੀ ਜੇਨੋ ਤਾਂ ਪਰੇ ਚਲਾ ਗਿਆ ਤੇਨੋਕ ਤਾਂ ਫਸਾਉਣ ਵਾਲੇ ਨੇ ਜਾਲ ਹੈ ਤੇਨੋਕ ਤਾਂ ਜਾ ਇਹ ਤਾਂ ਪਰੇ ਹੋ ਗਿਆ ਉਹ ਪਰ ਜਿੱਥੇ ਤੇਰਾ ਆ ਰਿਹਾ ਤੇਰਾ ਅਜੇ ਵੀ ਮੂਲ ਵਾਸਤੇ ਜਾ ਰਿਹਾ ਜੀ ਕਿ ਪਰਮੇਸ਼ਰ ਵਾਸਤੇ ਪਰਮੇਸ਼ਰ ਵਾਸਤੇ ਗੁਰਬਾਣੀ ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਹੜਾ ਤੇਰੇ ਜੁੜ ਗਿਆ ਤਿਸ ਮੁਖ ਉਜਲਾ ਉਹ ਮੁਖ ਉਜਲਾ ਉਦੇ ਭੁਖਰੇ ਵਿੱਚੋਂ ਕੋਈ ਵੀ ਭਰਮ ਗਿਆਨ ਦੀ ਗੱਲ ਨਹੀਂ ਨਿਕਲ ਸਕਦੀ ਉਦੇ ਜੋ ਗਿਆਨ ਨਿਕਲੂਗਾ ਪਰਮਲੀ ਨਿਕਲਦਾ ਜਿਸ ਨੂੰ ਤੇਰਾ ਅੰਗ ਸੋ ਡਿਰਵਲੀ ਨਿਰਮਲਾ ਤੇਰਾ ਸਪਰਸ਼ ਹੋ ਜਿਹੜਾ ਤੈਨੂੰ ਪਰਸ ਵੀ ਤੇਰੋਂ ਲੈ ਨਿਰਮਲੇ ਹੈ ਪੁਰੀਤ ਹੋ ਜਾਂਦਾ ਹੈ ਪਵਿੱਤਰ ਪਵਿੱਤਰ ਪਵਿੱਤਰ ਪੁਰੀਤ ਡਿਰਵਲੀ ਨਿਰਮਲਾ ਜੀ ਨਾ ਲੇਖਾ ਪੁੱਛੀ ਹੈ ਇਸ਼ਨ ਤੇਰੀ ਖੁਸ਼ੀ ਤਿੰਨ ਨੌ ਨਿੱਧ ਪੁੰਚੀਏ ਜਿਹਦਾ ਤੇਰੀ ਨਜ਼ਰ ਬੇਰਦੀ ਤੁਰਾ ਨਨੇ ਕਾ ਪੁੱਛਿਆ ਉਹਨੂੰ ਕੋਈ ਨਹੀਂ ਲੇਖਾ ਪੁੱਛਦਾ ਉਹਦੇ ਵਾਸਤੇ ਕੋਈ ਲੇਖਾ ਨਹੀਂ ਉਹਦੇ ਕਾ ਲੇਖਾ ਪਾਟਿਆ ਜਿਤਨੋਂ ਤੇ ਖੁਸ਼ੀ ਜੀਤੇ ਤੇ ਤੂੰ ਖੁਸ਼ ਆਂ ਜੀਤੇ ਤੇ ਤੂੰ ਪ੍ਰਸੰਨ ਐ ਤਿੰਨ ਨੌ ਨਿੱਧ ਨੂੰ ਨੌ ਨਵਾਂ ਖਜਾਨਾ ਪੁੱਛ ਉਹ ਜਿਹੜਾ ਗਿਆਨ ਪੁਜਾਰੀ ਥਾ ਨਾ ਆਹ ਗੁਰਬਾਣੀ ਗਿਆਨ ਨਾਮ ਇਹ ਖੰਦਾ ਹੋ ਪ੍ਰਭ ਗਿਆਨੀ ਦਾ ਭੋਜਨ ਗਿਆਨ ਪੁੱਛੀਏ ਉਹ ਨੇ ਤਾਂ ਨਵਾਂ ਖਜਾਲ ਗਿਆਨ ਦਾ ਪੁੱਛਦਾ ਉਹ ਪੁਰਬਾਉਣੀ ਦੀ ਜਿਹੜੀ ਸੋਝੀ ਹੈ ਸਮਝ ਗਿਆਨ ਇਹ ਖੁਰਾਕ ਹੈ ਇਹ ਨਵਾਂ ਪਹਿਲਾਂ ਦਿਖਾਉਣ ਕਿੱਥੇ ਠੀਕ ਹੈ ਸਾਰੇ ਪਈ ਨੇ ਤੁਹਾਡੇ ਕੋਲ ਸ਼ਾਸਤਰਾਂ ਦੇ ਵਿੱਚ ਨਹੀਂ ਗੱਲਾਂ ਹਨ ਕੀਤਾ ਵਿੱਚ ਨਹੀਂ ਗੱਲਾਂ ਹਨ ਜਿਹਨਾਂ ਜਪਾਇਆ ਤਾਂ ਉਹਨੇ ਜਪਿਆ ਲੋਗ ਆਪ ਜਪਾਏ ਜਪ ਕੇ ਕੁਝੀਆ ਤੇਰੀ ਹੋਈ ਤਾਂ ਜਪਾਇਆ ਤਾਂ ਜੋ ਜਿਸ ਤੂੰ ਪ੍ਰਭ ਵੱਲ ਤਿਸ ਕਾ ਤੂੰ ਪ੍ਰਭ ਵੱਲ ਪ੍ਰਭ ਜਿਹਦੇ ਮੋਹ ਜ਼ਿੰਦਗੀ ਉਹਨੂੰ ਜ਼ਿੰਦਗੀ ਪਰਵਾ ਗੁਰੂ ਵੀ ਕਿਸੇ ਦੀ ਪਰਵਾ ਹੈ ਹੋਰ ਕਿਸੇ ਦੇਵੀ ਦੇਵਤੇ ਦੀ ਉਹ ਹੀ ਨਹੀਂ ਬੰਦਾ ਕਿਸੇ ਵੱਡੇ ਤੋਂ ਵੱਡੇ ਅਵਤਾਰ ਦੀ ਉਹ ਉਹਨੂੰ ਪਰਵਾ ਨਹੀਂ ਹੈ ਜਿਸ ਨੂੰ ਤੇਰੀ ਮਿਹਰ ਜਿਹਦੇ ਤੇਰੀ ਮਿਹਰ ਹੈ ਤੇਰੀ ਬੰਦਗੀ ਕੋਈ ਤਾਂ ਤੇਰੀ ਬੰਦਗੀ ਹੈ ਤੇਰੀ ਫੇਰ ਹੈ ਉਸ ਵਾਸਤੇ ਬੰਦਗੀ ਹੈ ਇਹ ਫੇਰ ਤੇ ਵਿਚੀ ਹੋ ਰਹਿਦਾ ਹੈ ਤੇਰੇ ਹੁਕਮ 'ਚ ਰਹਿੰਦਾ ਬੰਦਗੀ ਉਹਦੇ ਹੁਣ ਪ੍ਰਭ ਆ ਗਿਆ ਜਿਸ ਨੂੰ ਤੂੰ ਪ੍ਰਭ ਵੱਲ ਆਹ ਪ੍ਰਭ ਦੇਖੋ ਨਾ ਬਾਪ ਦਾ ਬਾਪ ਵੀ ਬਾਪੇ ਹੁੰਦਾ ਹੈ ਅਸਲ ਜਿਹੜਾ ਚਿੱਤ ਬੋਲ ਰਿਹਾ ਫਿਰ ਤਾਂ ਪ੍ਰਭ ਉਹਦਾ ਪਰਮੇਸ਼ਰ ਹੀ ਹੈ ਪੁਰਾਣਾ ਸਭ ਪ੍ਰਭ ਜਿਹੜੇ ਉੱਤਰੋ ਆਓ ਆਪਣੀ ਭਾਸ਼ਾ ਚ ਆਪਣੇ ਪ੍ਰਭ ਨੂੰ ਕਹਿੰਦਾ ਹੈ ਮਨ ਆਪਣੀ ਕੁੰਦੀ ਆਪਣੀ ਭਾਸ਼ਾ ਚ ਆਪਣੇ ਤਰਫ ਠੀਕ ਹੈ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਉਹੀ ਤੇਰੀ ਬੰਦਗੀ ਕਰ ਰਿਹਾ ਹਾਂ ਜੀ ਜਿਹਦੇ ਤੇਰੀ ਮਿਹਰ ਹੈ ਤੇਰੇ ਹੁਕਮ ਜਨੇ ਤੇਰੇ ਪਾਲੀ ਨਾਲ ਬਹੁਤ ਠੀਕ ਹੈ ਜੀ ਫਿਰ ਇਸ ਗੱਲ ਨੂੰ ਸ਼ੇਖ ਫਰੀਦ ਜੀ ਵੀ ਕਹਿੰਦੇ ਸ਼ੇਖ ਫਰੀਦ ਪੈਰ ਦੀ ਜੇ ਬੰਦਗੀ ਹਾਂ ਜੀ